ਜੀ ਜੰਤਰ ਸਭ ਤਾਂ ਕੇ ਹਾਸ ਦੀਨ ਦਿਆਲ ਅਨਾਦ ਕੋ ਕੇ ਹਾਸ ਸਭ ਤਾਂ ਕੇ ਕੇ ਹਾਸ ਦੇਖੋ ਜੀ ਆ ਸਰੀਰ ਸਭ ਤਾਂ ਕੇ ਹਾਸ ਦੀਨ ਦਿਆਲ ਅਨਾਦ ਕੋ ਨਾਦ ਕਿਹੜਾ ਦਿਆਲ ਅਨਾਦ ਕੋ ਨਾਦ ਹੈ ਅਨਾਦ ਕਹੇਗਾ ਜੀਵ ਅਹਾ ਕੀ ਹੈ ਨਾ ਤੁ ਆਪੇ ਹੈ ਜੋ ਜੋ ਖਬਰ ਨਾਲ ਲਵੇ ਨਾ ਸੇ ਅਜਾ ਨਾਥ ਕੋ ਨਾਥ ਹੈ ਜਿਹੜਾ ਨਾ ਮਰਦੇ ਦਾ ਉਦੇ ਚੱਲਦੀ ਹੈ ਮੰਤਰ ਉਦਾ ਚੱਲਦਾ ਤੰਤਰਾਂ ਜੰਤ ਹੈ ਦਾ ਮੰਤਰ ਚੱਲਦਾ ਪਰਮੇਸ਼ਰ ਦਾ ਪੂਰ ਬ੍ਰਹਮ ਦਾ ਬੁੱਤਰ ਬੁੱਤਰ ਕੀ ਹੈ ਨਾਮ ਨਾਮ ਅਤਰਾ ਨਾ ਸਵਾ ਦਾ ਜਲਦੀ ਇਹ ਸੱਚ ਹਣ ਦੇ ਨਾ ਬੰਦਰ ਤਾਂ ਉਹਨਾਂ ਦਾ ਚਲਦਾ ਇੱਥੇ ਜੋ ਹੁਣ ਠੀਕ ਹੈ ਨੀ ਸਰੀਰ ਹੈ ਇਹਦੇ ਕੋਲ ਜੰਤਰ ਜੰਤਰ ਸਰੀਰ ਮੰਤਰ ਉਹਦਾ ਜੰਤਰ ਇਹਦਾ ਜੋ ਸ੍ਰਿਸ਼ਟੀ ਬਣੀ ਤੰਤਰ ਹੋਇਆ ਤੰਤਰ ਜੋ ਪੈਦਾ ਹੋਇਆ ਉਹ ਜੋ ਉਹ ਫੇਰ ਉਹਦਾ ਜੰਤਰ ਜੀ ਜੰਤਕਾ ਢਾਗਰਾ ਨਹੀਂ ਗਿਆ। ਸ਼ਰੀਰ ਤਾਂ ਅਸੀਂ ਆਪਣਾ ਸਮਝਦੇ ਆਂ। ਸ਼ਰੀਰ ਨਾਲ ਕੁਝ ਕਰਦੇ ਆਂ, ਸਾਡੇ ਜੀ ਸ਼ਰੀਰ ਨਾਲੇ ਕਰਦੇ ਨੇ। ਪ੍ਰਕਰਾਇ ਉਹਦਾ ਕਰਦੇ ਨੇ। ਕਰਾਇਓ ਉਹਦਾ ਕਰਦੇ ਮਨ ਤਾਂ ਉਹਦਾ ਹੋ ਗਿਆ। ਜੰਤਰ ਸਾਡਾ ਹੋ ਗਿਆ। ਸ਼ਰੀਰ ਸਾਡਾ ਹੋ ਗਿਆ ਨਾ। ਜੋ ਸ਼ਰੀਰ ਨਾਲ ਕੀਤਾ ਉਹ ਤੰਦਰ ਹੋ ਗਿਆ। ਸ਼ਰੀਰ ਨਾਲ ਪੈਦਾ ਹੋਇਆ ਜੈ ਜੀਆ ਨੇ ਜੀ ਪੈਦਾ ਕੀਤੇ ਚਾਹੇ ਜੀਆ ਨੇ ਜੀ ਸਦਾਰੇ ਚਾਹੇ ਜੀਆ ਨੇ ਜੀ ਦਾ ਪਾਲਣਾ ਕੀਤਾ ਹੀ ਕੀਤਾ ਨਾ ਤੰਤਰ ਜੀਵ ਦਾ ਤੰਤਰ ਬ੍ਰਹਮ ਦਾ ਬੰਦਰ ਪੂਰਨ ਬ੍ਰਹਮ ਦਾ ਤੰਤਰ ਬ੍ਰਹਮ ਦਾ ਨਾ ਜੰਤਰ ਬ੍ਰਹਮ ਦਾ ਜੰਤਰ ਸਰੀਰ ਜੰਤਰ ਬ੍ਰਹਮ ਦਾ ਮੰਤਰ ਪੂਰਨ ਬ੍ਰਹਮ ਦਾ ਜੋ ਤੰਤਰ ਪੈਦਾ ਹੋਇਆ ਤੇ ਸ੍ਰਿਸ਼ਟੀ ਪੈਦਾ ਹੋਈ ਉਹ ਤਾਂ ਉਹ ਫੇਰ ਪੂਰਨ ਬ੍ਰਹਮ ਦੀ ਹੋਇਆ ਬ੍ਰਹਮ ਦਾ ਕੁਛ ਨਹੀਂ ਬਚਿਆ ਬ੍ਰਹਮੇ ਦਾ ਬੁਝੀ ਹਾਂ ਬ੍ਰਹਮੇ ਦਾ ਬੁਝੀ ਬ੍ਰਹਮ ਦਾ ਕੀ ਹੋਣਾ ਬ੍ਰਹਮਾ ਦਾ ਵਿਚਾਰ ਜਰਖਰੀਦ ਗੁਲਾਮ ਬੁਲਾਮ ਹੈ ਇਹ ਗੁਲਾਮ ਆ ਜਰਖਰੀਦ ਸੱਗਿਆ ਜੀ ਦਾ ਨਾਲ ਲਾਜਵੇਂ ਫੇਜੀਦਾ ਹੈ ਨਾ ਅੱਜ ਸਹੀ ਸਾਫਤਰੀ ਕੋਈ ਕਰ ਸਕਿਆ ਮੇਰਾ ਗੁਰਬਾਣੀ ਨੇ ਸਾਫ਼ ਕਹਤਾ ਤਾਂ ਤਰਤੀਬ ਤਨ ਭਸਮੇ ਤੇਰੀ। ਕਾਲੀੜਾ ਆਏਗਾ ਤੂੰ ਮੇਰਾ ਕਹਣਾ ਬਸਦੀ ਤੇਰੀ ਬਣ ਜਾਣਾ ਇੱਥੇ ਜੀ। ਚਾਹੇ ਹੁਲੇ ਬਣ ਜਵੇ ਚਾਹੇ 10-20 ਸਾਲ ਚ ਬਣ ਜਵੇ। ਰੱਖ ਦੇਣ ਕਬਰ ਚ ਉੱਥੇ ਵੀ ਭਸੂ ਬਣ ਜਾਣਾ ਮਿੱਟੀਓ ਬਣ ਜਾਣਾ। ਜੇ ਧਾਮ ਇਕੱਠਾ ਕਰ ਲੈਣਾ ਤਾਂ ਧਦੀ ਜੇ। ਬਣਾ ਕੇ ਪੱਥਰ ਬਣਾ ਕੇ ਲਾਤਾ ਧਾਮੀ ਧਰਤੀ ਤੇ ਹੀ ਹੈ। ਖਜ਼ਾਨਾ ਬਣਾ ਕੇ ਰੱਟਦਾ ਤਾਂ ਵੀ ਦੱਸੀ ਜਾਈਏ ਇਸ ਗੱਲ ਨੂੰ ਕੋਈ ਗਲਤ ਸਿੱਧਰੀ ਕਰ ਸਕਿਆ ਅਜੇ ਤੱਕ ਪਰ ਨਾਇਦ ਅੱਥਵਾ ਕੋਈ ਬੋਲੇ ਅਸਰ ਕਿ ਗੱਲ ਗਲਤ ਹੈ ਤੇ ਫਿਰ ਕਿਹਦਾ ਕੀ ਹੋਇਆ ਬਈ ਕਿਹੜਾ ਕੋਈ ਕਹਿੰਦੇ ਰਹੋ ਕਾਵਿਆਂ ਦੇ ਹੋਵੇ ਸਰਕਾਰਾਂ ਮੰਨਣ بڑے بڑے ਜੱਜ ਫੈਸਲੇ ਕਰਨਾ ਗੱਲ ਐਦੀ ਆ ਚੀਜ਼ ਐਦੀ ਆ ਉਹਦੀ ਐਕਚੁਅਲੀ ਕਿਸੇ ਦੀ ਨਹੀਂ ਕੋਈ ਐਕਚੁਅਲੀ ਕਿਸੇ ਦੀ ਨਹੀਂ ਰਲਤਾ ਬੋਲਦੀਆਂ ਨੇ ਪੰਚਾਇਤਾਂ ਬੋਲਦੀਆਂ ਨੇ ਥਾਣੇਦਾਰ ਮੰਦਰ ਅਬਜਤ ਜੇਕਰ ਸਦਾ ਕਰ ਲਵੇ ਗੁਰੂ ਨੇ ਮੰਨ ਅਸਾਦੀ ਕੋਈ ਹਕੀਕਤ ਹੈ ਹੀ ਇਹ ਕਿਸਦਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਿਆਲ ਅਨਾਥ ਕੋ ਨਾਲ ਦੀਨ ਦਿਆਲ ਅਨਾਥ ਕੋ ਨਾਲ ਦੇ ਦਿਆਲ ਆਨਾਤ ਕੋ ਨਾਟ ਹੈ ਜਿਹੜਾ ਅੱਜ ਦੀ ਜਨਤਾ ਸਰ ਉਹਦੇ ਹੱਥ ਜਿਸ ਰਾਹ ਤੇ ਕਿਸ ਕੋਈ ਨਾ ਮਾਰੇ ਸੋ ਹੋਆ ਜਿਸ ਮਨੋ ਬਸਾਰੇ ਜਿਸ ਰਾਹ ਕੇ ਤੇ ਕੋਈ ਨਾ ਮਾਰੇ ਜਿਹਨੂੰ ਰੱਖਿਆ ਕਰੇ ਉਹਦੀ है ਕੋਣ ਮਾਰ ਦੂ ਸਰਕਾਰ ਦਾ ਬੁਲਤੀ ਹੈ ਅੱਜ ਫਰਸੀ ਦੇ ਦਿੰਦਾ ਗੋਮਣਾ ਵਾਲੇ ਦਾ ਨਹੀਂ ਪਤਾ ਪਹਿਲਾਂ ਜਿਹੜਾ ਉਹਨੇ ਕੰਮ ਕੀਤਾ ਕਿਹਨੇ ਕਰਾਇਆ ਉਹਦਾ ਵੀ ਨਹੀਂ ਪਤਾ ਜਿਹੜੇ ਉਹਨੇ ਕੋ ਕਰਮ ਕੀਤੇ ਉਹਦਾ ਵੀ ਨਹੀਂ ਪਤਾ ਇਹਨਾਂ ਨੂੰ ਕਿਹਨੇ ਕਰਾਇਆ ਕਿ ਬਿੱਤੋ ਤਾਂ ਕਹਿੰਦੇ ਇਹਨੂੰ ਕੀਤਾ ਅਸੀਂ ਇਹਨੂੰ ਫਸਿਦਦੇ ਆ ਉਹ ਸਾਰੇ ਜਲਾਨ ਕਰਦੇ ਨੇ ਇਹ ਸਾਡੀ ਧਰਨਾ ਸੰਸਾਰ ਦੀ ਧਰਨਾ ਇਹ ਪਰ ਜਿਹੜਾ ਦ੍ਰਿਸ਼ਟੀਕੋਣ ਵਰਵੰਦੀ ਦਾ ਹੋਰ ਹੈ ਇਹ ਕਰਕੇ ਉਹ ਪਕਸਾਨਾ ਦ੍ਰਿਸ਼ਟੀਕੋਣ ਫਰਜ਼ਾਤੇ ਸੰਸਾਰੀਆਂ ਉਹ ਲੋੜੀ ਉਹ بڑے بڑے ਵਿਦਵਾਨ ਬੈਠੇ ਨੇ ਸੁਪਰੀਮ ਕੋਰਟ ਦੇ ਜੱਜ ਬੈਠੇ ਨੇ ਫਰਜ਼ਾਤੀ ਨਹੀਂ ਉਹਨਾਂ ਗੱਲ ਪੇਟਾ ਰਹੇ ਸੰਸਾਰੀ ਹੈ ਉਹ ਉਹ ਸੰਸਾਰੀ ਅਦਾਲਤਾਂ ਉਹ ਸੰਸਾਰੀ ਅਦਾਲਤਾਂ ਦੇ ਸੰਸਾਰੀ ਇੱਥੇ ਵੀ ਰਾਜ ਹੈ ਓਏ ਵੀ ਚੱਲੂਗਾ ਸੰਸਾਰੀ ਸੰਸਾਰੀ ਤੌਰ ਤੇ ਚੱਲੂਗਾ ਉਥੇ ਦਾ ਉਸੇ ਦੇ ਤੌਰ ਤੇ ਚੱਲੂਗਾ ਜਿਸ ਰਾਖੇ ਤੇ ਕੋਈ ਨਾ ਮਾਰੇ ਸੋ ਬੁਆ ਜਿਸ ਬੰਨੋਂ ਸਾਰੇ ਜਿਸ ਰਾਖੇ ਤੇ ਕੋਈ ਨਾ ਮਾਰੇ ਜੇ ਤੁਂ ਰੱਖਿਆ ਕਰਦਾ ਕੋਈ ਕੋਈ ਮਾਰਦਾ ਇਹ ਸਾਰੇ ਬੰਦੇ ਨੇ ਇਹ ਗੱਲੂ ਵੀ ਨੇ ਕੋਰਟਾਂ ਦੇ ਵੀ ਮੰਨਦੇ ਨੇ ਬੋਥਾ ਦੀਆਂ ਗੱਲਾਂ ਨੇ ਜਿਹੜੀਆਂ ਕੁਰਬਾਨੀ ਦੇ ਸਾਰੇ ਬੰਦੇ ਨੇ ਜਿਸ ਕੋਈ ਨਾ ਮਾਰੇ ਸੋ ਬੁਆ ਜਿਸ ਮਨੋਂ ਬੁਜਾਰੇ ਲਓ ਮਨਾਂ ਨੂੰ ਉਹ ਮਾਰਨ ਦੀ ਲੋੜ ਹੈ ਵੀ ਉਹ ਮਾਰਨ ਦੀ ਲੋੜ ਨੇ ਮਨੋਵਿਸਾਰ ਦੇ ਲੋੜ ਹਨ ਉਹਦਾ ਤਾਂ ਜੇ ਮਨੋਵਿਸਾਰਤਾ ਉਹ ਇੱਥੇ ਦੇ ਪਿੰਡਾਂ ਚ ਲਿਆ ਕੇ ਇੱਥੇ ਅਧੰਤ ਹੈ ਜਦ ਜਦ ਇਹ نیند ਆ ਜਾਂਦੀ ਹੈ ਉਹਨੂੰ ਅਧੰਤੇ ਬੈਠੇ ਬੈਠੇ ਨਾਲ نیند ਆ ਜਾਂਦੀ ਹੈ ਸੁਪਨਾ ਚੱਲੂ ਹੋ ਜਾਂਦਾ ਰਹਿੰਦਾ ਤਾਂ ਉੱਥੇ ਆ ਸੁਪਨੇ ਗਿਆ ਹੋਇਆ ਹੈ ਉਹਦਾ ਉੱਤੇ ਜੀ ਨਹੀਂ ਲੱਗਦਾ ਉਹ ਆਪਣਾ ਆਪਣੇ ਆਪ ਵਿੱਚ ਜਿਆ ਹੁੰਦਾ ਨਾ ਆਦਮੀ ਜਿਹੜਾ ਉਹ ਸੁੰਦਾ ਰਹਿੰਦਾ ਦੇਖਿਆ ਨਹੀਂ ਉੱਤੇ ਜੇ ਪਾਰਲੀਮੈਂਟ ਦੇ ਉੱਤੇ ਸੁਤੇ ਪਏ ਹੁੰਦੇ ਕਿ ਸੁਤੇ ਪੈਣੇ ਸੁਣਦੇ ਨਹੀਂ ਹੁੰਦੇ ਜਾਂ ਨਾਮ ਤੋਂ ਧਿਆਨ ਹਟ ਜਾਂਦਾ ਨਾਮ ਤਾਂ ਹਰ ਵਕਤੇ ਚੱਲਦਾ ਰਹੇ ਧਿਆਨ ਦੇ ਵਾਰ ਜਾਂਦਾ ਸੁਣਾਦਾ ਜੀਰੋ ਹਰ ਵਕਤ ਗਿਆ ਸਮਝ ਜਾਂਦਾ ਸੋਝ ਜਾਂਦਾ ਸੁਪਨਾ ਆ ਜਾਂਦਾ ਸੁਪਨਾ ਆ ਜਾਂਦਾ ਉਹ ਉੱਥੇ ਨਹੀਂ ਹੁੰਦਾ ਫਿਰ ਇੱਥੇ ਕਾ ਜਾਗਦਾ ਜਾ ਦੇਖੀ ਜਾਊਗੀ ਉਹ ਤੇ ਗੜਾ ਭੁੱਖ ਲੱਗਦੀ ਰਹੇ ਨਾ ਰੋਟੀ ਖਾਣੇ ਸਰੀਰ ਤਾਂ ਹੀ ਨਹੀਂ ਉੱਥੇ ਚਾਹ ਵੀ 50000 ਸਾਲ ਚਾਹੇ ਸੁੱਤਾ ਰਹੇ ਕੋਈ ਦਿਨ ਇਹਨਾਂ ਬਿਦੂ ਖੁੱਡਦਾ ਨਾ ਕੋਈ ਦਿਨ ਸੁਖ ਲੈਦਾ ਸਮਾਰਕ ਚੱਕ ਜਾਂਦਾ ਮੇਰਾ ਪੰਜਾਬ ਦਿਮਾਗ ਹੈ ਬੜੀ ਚੰਤਾ ਕੀਤੀ ਐ ਲੋਕਾਂ ਨੇ ਚਿੱਤ ਆਇਆ ਜਿਹੜੇ ਜਾਗਦੇ ਨੇ ਉਹ ਦਿੰਦਾ ਉਹ ਆਪਣਾ ਸੁਖ ਲੈ ਰਿਹਾ तेज तज अगर कहां एक निरंजन राए तेज तज उन तज के ऐसे करके जो सो बुआ फिर तो मरया करके जिन्ना नु ए तरह ज्ञान है सो बुआ जो मनो बसारे ओ नहीं छड़ते तेज अगर कहां को जाए ਸਿੱਧਾ ਅਵਰ ਕਹਾ ਕੋ ਜਾਏ ਅਬ ਸਭ ਸਰ ਇੱਕ ਨਿਰੰਜਣ ਰਾਹ ਕੋ ਜਾਏ ਕਿੱਥੇ ਜਾਵੇ ਕੋ ਜੱਪੇ ਜਾਲ ਜਿਵਾਛੇ ਤੇ ਜਾਊਗਾ ਜਾਂਦੇ ਜਿਗੂਗਾ ਜਾਂਦੇ ਜਾਲ ਫਸ ਜਾਊਗਾ ਵੇਖੋ ਸਰਕਾ ਸਾਰੇ ਉੱਥੇ ਕਲਾ ਕਰਦੇ ਹੁੰਦੇ ਨੇ ਥੱਲੇ ਜਾਲ ਹੁੰਦਾ ਜੇ ਉਤੋਂ ਛੁੱਟ ਜਾਣ ਹੱਥ ਜਾਲ ਜਾ ਫਸ ਜਾਂਦੇ ਜਿਆਦਾ ਵੋਝ ਲੈਂਦਾ ਹੁਣ ਜੰਮ ਦਾ ਜਾਲ ਲੱਗਿਆ ਉਹ ਵੋਝ ਲੈਂਦਾ ਕੱਠਾ ਜਾ ਕਰਕੇ ਮੋਢੇ ਤੇ ਆ ਕੇ ਆਪਣਾ ਲੈ ਜਾਂਦਾ ਹਾਂਜੀ ਸਭ ਸਿਰ ਇੱਕ ਨਿਰੰਜਨ ਦਾ ਹੈ ਸਭ ਸਿਰ ਇੱਕ ਨਿਰੰਜਨ ਦਾ ਹੈ ਸਾਧਨ ਦੇ ਸਤੇ ਨਿਰੰਜਨ ਦਾ ਹੈ ਹੁਕਮ ਸਾਧਾਂ ਦੇ ਸਤੇ ਹੀ ਹੈ ਜੀ ਕੀ ਜੁਗਤ ਜਾ ਕੇ ਸਭ ਹਾਰ ਨਿਰੰਜਨ ਦਾ ਹੁਕਮ ਬਾਸਿਆ ਹੋਇਆ ਹੈ ਨਾ ਜਿੱਦ ਨਿਰੰਜਨ ਨੇ ਰਹਿਤ ਨੇ ਉਹਨਾਂ ਦਾ ਹੈ ਉਹ ਪੂਰਬ ਨਾ ਜਾਣੇ ਨਾ ਨਰ ਅੰਜਨ ਮਾਇਆ ਤਾਂ ਰਹਿਤ ਕਿਸਨ ਮਾਇਨੋ ਰੰਗ ਰਹੀ ਹੈ ਨਾਂਜਾ ਹੁੰਦਾ ਅੰਨਤੋ ਰਹੇ ਵਾਇਤੋ ਰਹੇ ਉਹ ਕੋਲੂ ਬ੍ਰਹਮ ਉਹਦੇ ਉੱਤੇ ਕੌਣ ਹੈ ਹੁਕਮ ਜੋ ਜੀ ਕੀ ਜੁਗਤ ਜਾ ਕੇ ਸਭ ਹਾਥ ਹੁਕਮ ਤਾਂ ਵਿਛੜਿਆ ਹੋਇਆ ਜਾ ਕੇ ਦਿਖਦਾ ਮਾਰਾ ਚੋ ਹਾਂ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰਵਾਹ ਜਿਹੜੇ ਇਹਦੇ ਬਿਮਾਰੀਆਂ ਦੇ ਜਾ ਕੇ ਖਲਣੀਆਂ ਸਮਝਾ ਕੇ ਦੂਰ ਹੋਣੀਆਂ ਨੇ ਦੋ ਸਮਝੋ ਕਿ ਮੈਂ ਸਮਝੂਗਾ ਕਿੱਥੇ ਇਹਨੂੰ ਭਲੇਖਾ ਪਿਆ ਹੋਇਆ ਉਹ ਭਲੇਖਾ ਕਿਵੇਂ ਕੱਢਣਾ ਹੈ ਡਿਫਰੈਂਟ ਕਿਸਮ ਦੇ ਸਵਾਲ ਨਹੀਂ ਲੋਕਾਂ ਨੇ ਕਿ ਕਿਸਮ ਦੇ ਲਿਖੇ ਨੇ ਉਹ ਚੁਪਤੀ ਸਾਡੀ ਉਹਦੇ ਹੱਥਰ ਸਮਝੋ ਜਿੱਕੀ ਚੁਪਤੀ ਜਾ ਕੇ ਜਾ ਕੇ ਸਭ ਰਾਹ ਅੰਦਰ ਬਾਹਰ ਜਾਨੋ ਦਾ ਜਲੋਣ ਵਾਲੀ ਵੀ ਜਾਨਦਾ ਜਲੋਣ ਵਾਲੀ ਵੀ ਜਾਨਦਾ ਕੋਈ ਡਾਕਟਰ ਤੰਦਰੁਸਤ ਕਰਦਾ ਕਿ ਬਿਮਾਰ ਨਹੀਂ ਕਰਦਾ ਬਿਮਾਰ ਕਰਨਾ ਸਿਖਾਦਾ ਹੈ ਕੋਈ ਡਾਕਟਰ ਬਿਮਾਰ ਕਰ ਵੀ ਲੱਗ ਜਾਂਦਾ ਨਹੀਂ ਲੋਕ ਆਖ ਬਣੇ ਰਹਿੰਦੇ ਤੰਦਰੁਸਤ ਕਰ ਕਰ ਭੇਜਦੇ ਫਿਰਦਾ ਖਰਚਾ ਜਿਗਾਂ ਕੇ ਡਾਕਟਰ ਹੈ ਜਿਹਨੇ ਬਿਮਾਰ ਕਰਨਾ ਲਈ ਤੂੰ ਮਹਾਦ ਰਖੋ ਕਹੋ ਕਹੂ ਤੇਰਾ ਜੰਦਾ ਦਾਨ ਹੋਗਾ ਹਾਂਜੀ ਜੀ ਕੀ ਜੁਗਤੋ ਜਾ ਕੇ ਸਭ ਹਾਜ਼ਰ ਅੰਦਰ ਬਾਹਰ ਜਾਣੋ ਸਾਥ ਅੰਦਰ ਬਾਹਰ ਜਾਣੋ ਸਾਥ ਅੰਦਰ আর ਬਾਹਰ ਜਾਏ ਤਕੋ ਜੇ ਅੰਦਰ ਟਿਕ ਜੇਗਾ ਤਾਂ ਵੀ ਹੁਕਮ ਦੇ ਨਾਲੇ ਜੇ ਬਾਹਰ ਜਾਏਗਾ ਤਾਂ ਵੀ ਹੁਕਮ ਬਾਹਰ ਵੀ ਕੋਈ ਨਹੀਂ ਕਹਦਾ ਤੂੰ ਪਰ ਕੋਮ ਤਾਂ ਬਾਹਰ ਪਾਜ ਕੇ ਬਾਹਰ ਬੱਢੀ ਜਾ ਸਕਦਾ ਅੰਦਰ ਧਾਮ ਹੀ ਪੁੰਚ ਜੈ ਬਾਹਰ ਧਾਮੇ ਤੇਰੀਆਂ ਵੀ ਬਾਹਰ ਨਿਕਲ ਗਿਆ ਹੁੰਦੇ ਹੁਣ ਕੋਣ ਕੋਈ ਮੈਨੂੰ ਫੜ ਸਕਦੀ ਮੇਰੇ ਜਿਹੜੇ ਤਾਂ ਬਾਹਰ ਸਾਰੇ ਜਿਹੜੇ ਆ ਅੰਦਰ ਵੈਸੇ ਜਿਹੜੇ ਹੈਗੇ ਜੇ ਕੋਈ ਨੂੰ ਤਾਂ ਅੰਦਰੋਂ ਅੰਦਰ ਕੀ ਹੈ ਅੰਦਰੋਂ ਉਹ ਬਦਲੋ ਜਿਹੜਾ ਹੈਗਾ ਉਹ ਸਾਰਥਕਾ ਗੁੱਜਰੋ ਅਸਲ ਬਲ ਇਹ ਦਬਾ ਕਰਕੇ ਮੰਨਣਾ ਵਾਰੋ ਵਾਰੋ ਮੰਨਣਾ ਉਹਦਾ ਤਾਂ ਮੰਨਦਾ ਵੀ ਜਾਂ ਦੌਲਭੂ ਦਾ ਜਲ ਭੜੀ ਉਹਦਾ ਸਿਰ ਮਜਬੂਰੀ ਨੂੰ ਮੰਨਣਾ ਮਜਬੂਰੀ ਨੂੰ ਮੰਨਣਾ ਉਹ ਕਿਹੜਾ ਹੋਰ ਗੱਲ ਹੈ ਜੇ ਮੰਨਣਾ ਹੋਰ ਦੋ ਗੱਲਾਂ ਹੋਰ ਜੈਸੋਦਰਨ ਜੈਸੋਦਰ ਰਾਜ ਆਇਆ ਜਦ ਮੀਣਾ ਜਿਹੜਾ ਰਲੇਰ ਤੇ ਗੁਰੂ ਘਰ ਤੇ ਖਲਾਫ ਇਕੱਠੇ ਹੋਏ ਨਾ ਫਿਰੇ ਦੋਸ ਸਾਰੇ ਸਤਖਾਲਸਾ ਦੂਏ ਇਕੱਠੇ ਹੋਏ ਨਾ ਬਸਈ ਖਾਲਸਾ ਸਾਰੇ ਇਕੱਠੇ ਹੋ ਗਏ ਜਦ ਬਾਦ ਚ ਉਹਨੇ ਬਾਦ ਉਸੇ ਬਾਦ ਪਰ ਉਦਰੋਂ ਇਕੱਠੇ ਜਿਓਏ ਬਸਈ ਪਰੋਂ ਮਰੋਂ ਇਕੱਠੇ ਅੰਦਰੋਂ ਨੇ ਇਕੱਠੇ ਉਦਰੋਂ ਕੋ ਮ ਇਕੱਠੇ ਅੰਦਰੋਂ ਤਾਂ ਗੁਰੂ ਨੇ ਇਕੱਠੇ ਕਰਦਾ ਸਵੇ ਸਭ ਲੋਭ ਨੇ ਇਕੱਠੇ ਕੀਤੇ ਲੋਭ ਨਾਲ ਇਹ ਲੈਂਦੇ ਵੀ ਰਾਜ ਆ ਸਕਦਾ ਹੈ ਆ ਨੇ ਉਹ ਜਿਹੜਾ ਮੁਸਲਮਾਨ ਨਾਲ ਨਫਰਤ ਪੈਦਾ ਕੀਤੀ ਨੇ ਤੇ ਹਸ ਲਿਖ ਲੱਗੇ ਉਹ ਮੁਸਲਮਾਨ ਉਹਦਾ ਕਾਹਨ ਮੈਨੂੰ ਦਿਮਾਗ ਚੋਂ ਕੱਢਦਾ ਸਰ ਤਤਕਾਲ ਜਿਵੇਂ ਹੋਈ ਉਹ ਮੈਂ ਜਾ ਬੁਸਨਾ ਬੈਸ ਉਹ ਫਿਰ ਮੈਂ ਉਹ ਭਈ ਜਿਹੜੇ 5 ਰੁਪਏ ਸਿਰਾਂ ਦਾ ਬੁੱਲ ਪਿਆ ਉਹ ਭੁਗਤਾਨ ਤੇ ਆਇਆ ਬਸ ਭਈ ਬਾਹਰਿਆਂ ਨਾਲ ਜਿਹੜੇ ਉਹ ਕੰਮ ਕੀਤੇ ਨੇ ਉਪਰ ਕੁਝ ਨਹੀਂ ਹੋਇਆ ਆ ਹੁਣ ਇਹਨਾਂ ਨੂੰ ਉਹੀ ਭੁਗਤਾਨ ਕਰ ਰਿਹਾ ਔੜ ਕੀ ਭੁਗਤਾਨ ਕਰ ਰਿਹਾ ਕੀ ਲੋੜ ਸੀ ਨਾ ਦੌੜ ਦੀ ਰਾਜੇ ਮੁਸਲਮਾਨਾ ਕਰੋਣਾ ਚਾਹੀਦਾ ਬਹੁਤ ਬੜੀ ਗਲਤੀ ਕੀਤੀ ਇਹਨਾਂ ਦਾ ਇਸਲਾਮ ਵਾਲੇ ਬਿਲਕੁਲ ਇਸਲਾਮ ਵਾਲਿਆਂ ਨੇ ਸਾਰਾ ਬੇੜਾ ਕਰ ਦਿੱਤਾ ਨੇ ਸਾਰਾ ਇਤਿਹਾਸ ਦੁਆ ਲਖਾਇਆ ਇਸਲਾਮ ਵਾਲਿਆਂ ਨੇ ਸਾਰਾ ਬੱਲੇ ਹੋਰ ਉਸੇ ਦਾ ਸਿੱਖੀ ਬੁਰੀ ਸਟ੍ਰੌਮ ਹੈ ਜਿਹਨੂੰ ਜਦੋਂ ਬਿਲਕੁਲ ਗਲਤੀ ਹੋਈ ਹੈ ਬਹੁਤ ਬੜੀ ਗਲਤੀ ਹੋਈ ਹੈ ਬਦਮਾਨ ਜਿੱਦ ਹੀ ਪਾ ਰਹੇ ਨੇ 47 ਦੇ ਜਦੋਂ ਕਹਿੰਦਾ ਅਸਵਾਲ ਕਾਲੀ ਗੋਲ ਨਹੀਂ ਚੱਲੀ ਹੋਣੀ ਉਹ ਕਹਿੰਦਾ ਬੱ ਚੱਲੀ ਰਹੀ ਹੋਈ ਉਹ ਅਕਾਲੀ ਕੋਲ ਆਦਮੀ ਜੰਮ ਜੂਏ ਸੀਗਾ ਚਾਹ ਤਰ ਦਾਲੀ ਉਹ ਗੱਲ ਨਹੀਂ ਸੀ ਵੀ ਸਾਡੇ ਉਹ ਨਹੀਂ ਉਹਨਾਂ ਨੂੰ ਅਸੀਂ ਵੀ ਸਖਵਾ ਜਾਂਗੇ ਉਹ ਰਾਜਾ ਜਨਾ ਮੇ ਹੌਲੇ ਮੱਥਾ ਟੇਕਦੇ ਨੇ ਵਿਰੋਧ ਦੀ ਫਸਾਤ ਫਲਾਂ ਵੀ ਟੇਕਦੇ ਸੀ ਵੀੜੇ ਬਥੇੜੀ ਦਿੱਤੇ ਹੋਏ ਸੀ ਫਿਰ ਜਦ ਕਿ ਮੱਥਾ ਦੀ ਜੇ ਕੋਈ ਗੱਲ ਨਹੀਂ ਸਮਝਿਆ ਬਹੁਤ ਬੜੀ ਗਲਤੀ ਹੋਈ ਉਹ ਹੁਣ ਸਾਰੇ ਅਕਾਲੀਓ ਖਿਲਾਫ ਖੜੇ ਨੇ ਵਰਮਤ ਨਹੀਂ ਅੱਗੇ ਆਉਣ ਦੇਣਗੇ ਗੱਲ ਜਿੰਨਾ ਵੀ ਜੋਰ ਲਾ ਲੋਗੇ ਖਲਾਫ ਬੋਲਣਗੇ ਨਹੀਂ ਅੰਦਰੋਂ ਆਉਣ ਨਹੀਂ ਦੇਣਗੇ ਕੇ ਨਾ ਨਾ ਖਲਾਫੀ ਆਪ ਦੀ ਬੋਲਣਗੇ ਅੰਦਰੋਂ ਵੈਸਾ ਜੇ ਏਜ ਰੱਖਣੇ ਬਾਦੋਂ ਜੇ ਇਹ ਨਹੀਂ ਰੱਖਣਾ ਬਾਦੋਂ ਸਭ ਪੁੱਛ ਤੇ ਤੇ ਤਾਂ ਸੇ ਕਬਲੇ ਹੋ ਗਏ ਸਾਡਾ ਸਾਡੇ ਬਣਾ ਦਾ ਸਾਡੇ ਰਹਿਣਾ ਸਾਡੂ ਐ ਕਾ ਕਰਨਾ ਤੁਹਾਨੂੰ ਉਹ ਕਰ ਦਿੰਦੇ ਸਾਡਾ ਪਾਣੀ ਲੈ ਜਾਣੇ ਅਕਸਰ ਲੈ ਜਾਂਦੇ ਪਾਣੀ ਸਾਡੇ ਹੀ ਨੂੰ ਪਗਾਉਂਦੇ ਨੇ ਤੁਹਾਡਾ ਪਾਣੀ ਲੈ ਜਾਂਦੇ ਉਹ ਬਾਣੀ ਸਾਹਮਣੇ ਤੇ ਜਿਹੜੇ ਮਾਸੀ ਬੜੇ ਪਿਆਰ ਆਇਆ ਚੰਪਾਲ ਸਾਹਿਬ ਕੋਲ ਉਹ ਬਗਾਨੇ ਨੇ ਇਹਨਾਂ ਨੇ ਵਟਾ ਕਿਉਂ ਪਾਈਓ ਉਹ ਤੱਕੇ ਹਰਿਆਣਾ ਦੀ ਐਸੀ ਕਿਸੇ ਅਲੱਗ ਬਣਦੀ ਹੈ ਹਰਿਆਣੇ ਨੇ ਸ਼੍ਰੋਮਣੀ ਕਮੇਟੀ ਬਣਦੀ ਹੈ ਕਿਉਂ ਬਣਦੀ ਹੈ ਕਿਉਂ ਨਾ ਦੇ ਦਮਾਂ ਕਿਹਾ ਇਹ ਗੱਲ ਅਸੀਂ ਬਣਾਈਏ ਜੁਬਾਰੀ ਥੋੜੀ ਨਹੀਂ ਹੈ ਜਿਮਾ ਦੇ ਹੀ ਲਿਖੀਤਾ ਉਹਨਾਂ ਆਪਣਾ ਰੱਖਦਾ ਸਭ ਤੇ ਦੇਖਾ ਬਣਾਡ ਹੋ ਜਾਂਦੇ ਤੁਸੀਂ ਕੰਡੂ ਦੇ ਵਿੱਚ ਕਿਉਂ ਨਹੀਂ ਲਾਇਆ ਮੇਰੀ ਮਨੀਆਂ ਤੁਸੀਂ ਕਰੋ ਮੜਾਈ ਮੜਾਈ ਤੁਸੀਂ ਖਾਜੋ ਉਹਨਾਂ ਨੂੰ ਛੱਡੀਆਂ ਦੇ ਦੋ ਸਭ ਪਾਣੀ ਤੇ ਆ ਕੇ ਹੀ ਸਾਰੇ ਹਰੇਲਿਆਂ ਵਿੱਚ ਬੋਸਤਰੀ ਜ਼ਮੀਨ ਹਾਲੇ ਨੇ ਥੋੜੇ ਨਾਲ ਕੇ ਭਿਜਾਉਂਦੇ ਹੋ। ਅੱਡੀ ਗੱਲ ਤਾਂ ਪਾਣੀ ਵਾਲੀ ਜੀ ਸਾਰੇ ਗੱਲ ਨੇ ਕਿਸਾਨ ਨੇ ਜੀ ਵੀ ਵਾਲੇ ਨੇ। ਥੋੜਾ ਕਿਵੇਂ ਰਹਿਣਗੇ ਤੁਸੀਂ ਤਾਂ ਉਹਨਾਂ ਨੂੰ ਵੱਲ ਬਣਦਾ ਦੀ ਵਰਜੰਦ। ਹੋਈ ਗुणनिधान ਬਿਆਨਤ અપਾਰ ਨਾਨਕ ਦਾ ਸਦਾ ਬਲਿਹਾਰ ਗुणनिधान ਬਿਆਨਤ અપਾਰ ਗੁਨਾਹਾਂ ਦਾ ਨਿਗਾਹ ਉਹਨਾਂ ਦਾ ਖਜ਼ਾਨਾ ਬੇਅੰਤ ਗੁਨਾਹਾਂ ਦਾ ਖਜ਼ਾਨਾ ਅਪਾਰ ਗੁਨਾਹਾਂ ਦਾ ਖਜ਼ਾਨਾ ਉਹਨਾਂ ਦਾ ਆ ਬੇਅੰਤ ਬਾਹਰ ਗੁਨਾਹਾਂ ਦਾ ਖਜ਼ਾਨਾ ਹੈਗਾ ਬੇਅੰਤ ਬਾਹਰ ਉਹਦੇ ਨਾਲ ਲੱਗਿਆ ਹੋਇਆ ਕਿੰਨਾ ਨੇ ਬੇਅੰਤ ਬਾਹਰ ਗੁਨਾਹਾਂ ਦੇ ਬੇਅੰਤ ਬਾਹਰ ਗੁਨਾਹਾਂ ਦਾਸ ਕਹਿੰਦਾ ਉਹ ਸਦਾ ਬਲਹਾਰ